ਅਥ ਧਨਕ ਵਿਦਿਆ ਸੀਖਨ ਸੋਈਆ ਆਇਸ ਪਾਏ ਪਿਤਾ ਤੇ ਦੋ ਧਨ ਸੀਖਨ ਕੀ ਵਿਦ ਚਲੇ ਜਿਨ ਕੇ ਮੁਖ ਕੀ ਸਮ ਚੰਦਰ ਪ੍ਰਵਾਹ ਜੋ ਵੀਰਨ ਤੇ ਬਰ ਵੀਰ ਭਲੇ ਗੁਰ ਪਾਸ ਸੰਦੀਪਨ ਕੇ ਤਭੀ ਦਿਨ ਥੋਰਨ ਮੈਂ ਪਹਿ ਜਾਏ ਖਲੇ ਜਿਨੂ ਕਪ ਕਹ ਮੁਰਨਾਮ ਮਰਿਓ ਜਿਨੂ ਛਲ ਸੋ ਬਲ ਰਾਜ ਛਲੇ ਸੋਈਆ 64 ਦਿਨਸ ਮੈਂ ਸ਼ਾਮ ਕਹ ਸਭ ਹੀ ਤੇ ਵਿਦ ਸੀਖ ਸੋ 65ਵੇਂ ਦਿਨ ਪ੍ਰਾਪਤ ਪਏ ਗੁਰ ਸੋ ਉਠ ਕੈ ਇਹ ਕੀਨੀ ਤਉ ਗੁਰ ਸੋ ਬਾਤ ਪੈ ਮੰਗ ਕੈ ਲਈਨੀ ਸੋ ਸੁਣ ਸਰੋਨਨ ਬੀਜ ਦੂ ਜੋ ਵਾਹੇ ਕਹੀ ਤਿਹ ਕੋ ਸੋਈ ਦੀਨੀ ਸਈਆ ਵੀਰ ਬਡੇ ਰਥ ਬੈਠ ਦਊ ਚਲ ਕੈ ਟਟ ਸੋ ਨਦੀ ਆਪਤ ਆਏ ਤਾਹੀ ਕੋ ਰੂਪ ਨਿਹਾਰ ਤੀ ਬਚਨਾ ਤਨ ਸੀਸ ਝੁਕਾਏ ਏਕ ਬਲੀ ਏ ਬੀਚ ਰਹਿ ਨਹੀਂ ਜਾਣਤ ਹੈ ਤਨ ਹੂ ਕੇ ਚੁਰਾਏ ਸੋਸਨ ਵਿਚ ਤਸੇ ਜਲ ਕੈ ਕਰ ਕੋਪ ਦਹੂ ਤਸੇ ਜਲ ਕੇ ਜਬ ਹੀ ਇਕ ਰੂਪ ਪਿਆਨ ਕਦੈ ਨਿਹਾਰਿਓ ਦੇਖਤ ਹੀ ਤੇ ਕੋਪ ਭਰੇ ਗਇਆ ਜਦ ਪਾਨ ਕਨੋ ਰਣ ਪਾਰਿਓ ਜੁਦ ਪਇਓ ਦਿਨ 20 ਤਹਾਂ ਤਿਹ ਕੋ ਜਸ ਪੈ ਕਬ ਸਿਆਮ ਉਚਾਰਿਓ ਜਿਉ ਰਾਜ ਮਰੈ ਮ੍ਰਿਗ ਕੋ ਤਿਮ ਸੋ ਕੁਪ ਕੈ ਜਦ ਬੀਰ ਪੁਛਾਰਿਓ ਹਿਤ ਦੈਦ ਬਧਾ ਸਵਈਆ ਮਾਰ ਕੇ ਰਾਖਸ਼ ਕੋ ਤਵਹੀ ਤਿਹ ਕੇ ਉਰ ਤੇ ਹਰਿ ਸ਼ੰਖ ਨਿਕਾਰਿਓ ਬੇਦਨ ਕੀ ਜਿਹ ਤੇ ਤੁਿ ਹੋਵਤ ਲਿਓ ਸੋ ਜੋ ਰਿਪ ਮਾਰਿਓ ਤਉ ਹਰਿ ਜੂ ਮਨ ਆਨੰਦ ਕੈ ਸਤ ਸੂਰਜ ਕੇ ਪਰਮੋ ਭਗਤਾਰਿਓ ਸੋ ਲਖ ਕੈ ਹਰਿ ਪਾਏ ਪਰਿਓ ਮਨ ਕੋ ਸਭ ਸੋਗ ਵਿਦਾ ਕਰ ਡਾਰਿਓ ਸੂਰਜ ਕੇ ਸੁਤ ਮੰਡਲ ਮੈਂ ਜਦ ਨੰਦਨ ਠੇਰ ਕਹਿਓ ਮੁਖ ਸੋ ਮੋਹ ਘੁਰ ਕੋਸ ਧਿਆਨਾ ਕਹੂੰ ਇਹ ਭਾਂਤ ਕਹਿਓ ਸੋ ਕਿਦੋ ਜਮ ਸੋ ਜਮ ਐਸੇ ਕਹਿਓ ਨਾ ਫਿਰੈ ਜਮ ਲੋਕ ਤੇ ਦੇਵਨ ਕੇ ਫੁਨ ਆਇਸ ਸੋ ਤਵਹੀ ਹਰ ਦੇਹੋ ਕਹਿਓ ਕਰ ਪੇਰ ਨਾ ਪੰਡਤ ਬਹਾਮਨ ਕੋ ਸੁਤ ਸੋ ਸਵਿਆ ਜਮ ਆਇਸ ਭਾਏ ਕਿਦੋ ਹਰ ਤੇ ਹਰ ਕੇ ਸੋ ਪਉਣ ਆਣ ਲਗਾਇਓ ਲਿਆ ਤਿਨ ਕੋ ਜਦ ਰਾਏ ਚਲਿਓ ਅਥੀ ਆਪਣੇ ਮਨ ਮੈਂ ਸੁਪਾਇਓ ਲਿਆ ਕੈ ਤਾਈ ਕੋ ਪੈ ਸੰਗ ਕੈ ਗੁਰ ਪਾਇਨ ਉਪਰ ਸੀਸ ਝੁਕਾਇਓ ਹੋਏ ਵਿਦਾ ਤਬਹੀ ਗੁਰ ਤੇ ਕਬਿ ਸ਼ਾਮ ਕਹੈ ਆਪਣੇ ਪੁਰ ਆਇਓ ਦੋਰਾ ਮਿਲੇ ਆਇ ਕੈ ਕੁਟੰਬ ਕੋ ਅਥੀ ਹਰਖ ਵਢਾਏ ਸੁਖ ਤੇਹ ਕੋ ਪ੍ਰਾਪਤ ਪਇਓ ਚਿਤ ਬਨ ਗਈ ਪਰਾਏ ਇਤ ਤਨੁ ਸੀਖ ਗੁਰ ਕੋ ਪੁੱਤਰ ਲਿਆਇ ਦिए ਸਮਾਪਤੰ ਅਥ ਉਦੋ ਬ੍ਰਿਜ ਭੇਜਿਆ ਸੋਇਆ ਸੋਵਤ ਹੀ ਇਹ ਚਿੰਤ ਕਰੀ ਬ੍ਰਿਜਵਾਸਨ ਸੋਜ ਇਹ ਕਾਰਜ ਕਈਐ ਪ੍ਰਾਤ ਪਹਿ ਤੇ ਬੁਲਾਏ ਕਹਿ ਉਦਵ ਭੇਜ ਕਹਿਓ ਤਿਹ ਠੋਰੈ ਦਈਐ ਗਵਾਰਨ ਜਾਏ ਸੰਤੋਖ ਕਰੇ ਸੋ ਸੰਤੋਖ ਕਰੈ ਹਮਰੀ ਧਮ ਮਈਐ ਯਾਤੇ ਨਾ ਬਾਤ ਪਲੀ ਕਛ ਹੈ ਮੋਹਿ ਬਿਵੇ ਕਹਿ ਕੋ ਝਗ ਰਈਐ ਸੋਇਆ रात पहे ते बुलाए कै ऊधव प बृज भूम भेज दयो है सो चल आनंद के तां गयो बतिया कै शोक असोक भयो है नंद कहो संग ऊधव के कबहु हरि जी मोहे चित्त कहयो है यो कह कह सुद श्याम कह पर सो मुरझाए पयो है ਜਬ ਅਨੰਦ ਪਰਿਉ ਗਿਰਪੂਮ ਵਿਖੈ ਤਵ ਯਾਹੇ ਕਹਿਓ ਜਦ ਵੀਰ ਆਏ ਸੁਨ ਕੈ ਬਤਿ ਆ ਉਠਾੜ ਪਇਓ ਮਨ ਕੇ ਸਭ ਸੋਗ ਪੁਰਾਏ ਗਏ ਉਠ ਕੈ ਸੁਦਸੋ ਇਹ ਭਾਂਤ ਕਹਿਓ ਹਮ ਜਾਣਤ ਉਦਵ ਪੀਚ ਕੈ ਤਜ ਕੈ ਬ੍ਰਿਜ ਕੋ ਪੁਰਬੀਜ ਗਏ ਫਿਰ ਕੈ ਬ੍ਰਿਜ ਮੈਂ ਨਹੀਂ ਸਿਆਮ ਆਏ ਸਿਆਮ ਗਏ ਤਜ ਕੈ ਬ੍ਰਿਜ ਕੋ ਬ੍ਰਿਜ ਲੋਗਨ ਕੋ ਵਤਹੀ ਦੁਖ ਦੀਨੋ ऊध बात सुनो हमरी तिहके बिनु भयो हम रोपुर हीनो दय बिदना हमरे गृह बालक पाप बिना हम ते फिर छीनो योग कह शीश चुकाए रहयो बहुत शोक बढयो पत रोदन कीनो सुइया कह कह ए बात परयो धर पै उठ फेर कहयो संग ऊध वियो तज कै ब्रज श्याम गए मथुरा हम संग ਤੁਮਰੇ ap pae ਲਗੋ uth ka so pai birtha so koh sab jio ਲੇਤ te nahi leet kachhu sudh hai mohe paap pachan kachhu ris syo savaiya sun ka tenu ud viyo batia eh pantan syo te uttar dino tho sudh so bas de veh ko tum te sab pae pravju nahi तीर गयो छट रोवत पयो इनहुं ते देखत रोदन कीनो सोइया हठ उद्धव कह ये पांत कहो पुर के पद सो कष सोख ना कीजए श्याम कहि मोय जो बतियाते की बिरथा सब ही सुन लीजए जाकी कथा सुन होत खुशी मन देखत ही जिसको मुख जीजे वाहे कहो न चिंत करो ना कछु एते तू रोहुन चीजए सोइया ਸੁਨ ਕਾਏ ਜੇ ਮਬੂਦ ਤੇ ਬਤਿਆ ਫਿਰ ਉਦਵ ਕੋ ਸੋ ਪੁੱਛਣ ਲਗਿਓ ਕਾਨ ਕਥਾ ਸੁਨ ਚਿੱਤ ਕੇ ਬੀਚ ਹੁਲਾਸ ਵੜਿਓ ਸਭ ਹੀ ਦੁਖ ਭਾਗਿਓ ਔਰ ਸਭ ਛੋਰ ਕਥਾ ਹਰ ਬਾਤ ਸੁਨਐ ਬੇ ਅਨੁਰਾਗਿਓ ਧਿਆਨ ਲਗਾਵਤ ਜਿਉ ਜੁਗਿਆ ਇਹ ਧਿਓ ਹਰਿ ਧਿਆਨ ਕੇ ਭੀਤਰ ਪਾਗਿਓ ਸਵਿਆ ਯੋਂ ਕਹਿ ਉਦਵ ਜਾਤ ਪਯੋ ਬ੍ਰਿਜ ਮੈ ਤਿਹ ਗਵਾਰਨ ਕੀ ਸੁਧ ਪਾਈ ਮਾਨੋ ਸੋਕ को ताम तो धुम ठोर ਸੋ सो तहां मुरझाई मून रही ग्रह बैठ त्रिया मनो यूं उपजी एते ਸੁਨੇ ਤੇ सुने ते प्रसन्न पई नह आए सुने फिर पी दुखदाई ओधवास विया ओधवा ग्वारन सोहे पांत कहो वार की बतिया सुन लीजै मार्ग जाहे कहो चलिये जो काज कहो सोऊ कार्य ਜੋਗਨ ਭਾਰ ਸਵੈ ਪਟ ਹੋਵੋ ਯੋ ਤੁਮ ਸੋ ਕਹੋ ਸੋ ਕਰੀਜੈ ਜੈ ਕੀ ਓਰ ਰੋਹ ਲਵਲਾਇ ਰੀ ਯਾ ਤੇ ਕਛੂ ਤੁਮਰੋ ਨਹੀਂ ਛੀਜੈ ਗਵਰਨਬਾਜ ਸਵਈਆ ਸੁਨ ਊਧਵ ਤੇ ਵਿਦਿਆ ਬਤਿਆ ਤਿਨ ਊਧਵ ਕੋ ਇਮ ਉਤਰ ਦੀਨੋ ਜਾ ਸੁਨ ਬਿਯੋਗ ਹੁਲਾਸ ਘਟੈ ਜਿਹਕੇ ਸੁਨੇ ਦੁਖ ਹੋਵਤ ਦੀਨੋ त्याग गए तू हो हमको हमरो तुमरे रस में मन पीनो यो कहो ता संग योग ही हो हर जीव तोहे प्रेम विदा कर दीनो सोया फिर कह संग ਕੇ के ब्रज भामन श्याम कहे ए पा तू चारयो त्याग गए ना ली सुध है रस सो हमरो मनवा तुम जारियो यो कह कह पुन ऐसे कहो ते कह सो किदो कव ज ਉਦਵ ਸਿਆਮ ਸੋ ਜੋ ਕਹੀਓ ਹਰ ਜੂ ਤੋਹ ਪ੍ਰੇਮ ਵਿਦਾ ਕਰ ੜਾਰਿਓ ਸ਼ੇਰ ਕਹਿਓ ਇਮ ਉਦਵ ਸੋ ਜਬ ਹੀ ਸਭ ਹੀ ਹਰ ਕੇ ਰਸ ਪੀਨੀ ਜੋ ਤਿਨ ਸੋ ਕਹਿਓ ਉਦਵਿਓ ਤਿਨ ਉਦਵ ਸੋ ਬਿੰਤੀ ਇਹ ਕੰਚਨ ਸੋ ਜਿਨ ਕੋ ਤਨ ਥੋ ਜੋ ਹਨ ਬਿਖੈ ਹੁਤੀ ਗਵਾਰ ਨਵੀਨੀ ਉਦਵ ਜੂ ਹਮ ਕੋ ਤਜ ਕੈ ਤੁਮਰੇ ਬਿਨ ਸਿਆਮ ਕਛੂ ਸੁਦਲੀਨੀ ਸੋਇਆ ਏਕ ਕਹੈ ਅਧਿਆਤ ਰਉਐ ਇਕ ਕੋ ਕਹੈ ਜਿਨ ਤੇ ਹਿਤ ਭਾਗਿਓ ਕੂਦਵਜੂ ਜੇ ਦੇਖਣ ਕੋ ਹਮਰੋ ਮਨੁ ਆਤਿ ਹੀ ਸੋ ਹਮ ਕੋ ਤਜ ਗਇਓ ਪੁਰਮੈ ਪੁਰ ਬਾਸਨ ਕੇ ਜੋ ਹਰਜੂ ਬ੍ਰਿਜਨਾਥ ਜੀ ਬ੍ਰਿਜਨਾਰਨ ਭੀ ਬ੍ਰਿਜਨਾਥ ਤਿਆਗਿਓ ਸਵਈਆ ਏਕਨਿ ਯੋ ਕਹੋ ਸ਼ਿਆਮ ਤਜਿਓ ਜੇ ਕੈਸੇ ਕਹੈ ਸਮ ਕਾਮ ਕਰੈਗੀ ਪੇਖ ਜਿਤੇ ਕਹੋ ਜੋਗਨ ਕੇ ਇਤਨੇ ਹਮ ਆਪਣੇ ਅੰਗ ਡਰੇਗੀ ਏਕ ਕਹ ਹਮ ਜਹ ਤਾ ਇੱਕ ਐਸੇ ਕਹ ਗੁਨ ਹੀ ਉਚਰੇਗੀ ਏਕ ਕਹ ਹਮ ਖੈ ਮਰ ਹੈ ਬਿਖ ਇੱਕ ਯੋਂ ਕਹ ਧਿਆਨ ਹੀ ਬੀਚ ਮਰੇਗੀ ਊਧ ਬਾਜ ਗੋਪਨ ਸੋ ਸੁਈਆ ਪਿਖ ਗਵਾਰਨ ਕੀ ਏ ਪਾਂ ਦਸਾ ਬਿਸਮੈ ਹੋਏ ਊਧ ਵੀ ਯੋਂ ਉਚਰੋ ਹਮ ਜਾਣਤ ਹੈ ਤੁਮਰੀ ਹਰ ਸੋ ਬਲ ਪ੍ਰੀਤ ਕਹਨੀ ਏ ਕਾਮ ਕਰੋ जो श्याम पठायो तुम पै हम को ए अंग धरो तज कह गृह को पुण काज मोरे ही ध्यान कै बिचरो गोपन बाच उद्धव सो सैया एक समय ब्रज कुंजन नु माया मोह कानन श्याम त टंक धराए कंचन के बहु मोल जरे नग ब्रह्म सकै उपमान अगनाए ਵੱਜਰ ਲਗੇ ਜਿਨ ਬੀਚ ਛਟਾ ਚਮਕੇ ਚਹੂ ਔਰ ਧਰਾ ਛਭ ਪਾਏ ਤੌਂ ਸਮੈ ਹਰ ਵੈਦੈ ਊਦਵਦੈ ਅਬ ਭਾਵਨ ਭੇਖ ਪਠਾਏ ਸੋਈਆ ਏਕ ਕਹੈ ਖਮ ਜੋਗਨ ਹੋਐ ਹੈ ਕਹੈ ਇਕ ਸਿਆਮ ਕਹੋਈ ਕਰਐਂਗੀ ਡਾਰ ਬਿਭੂਤ ਸਵੈ ਤਨ ਪੈ ਭਟੂਆ ਛਪਿਆ ਕਰ ਬੀਚ ਤਰਹਿਂਗੀ ਇਕ ਕਹ ਹਮ ਜਾਏ ਤਹਾਂ ਇਕ ਯੂ ਕਹ ਗੁਾਰ ਖਾਹ ਮਰੇਗੀ ਇਕ ਕਹ ਬਿਰਹਾਗਨ ਕੋਪ 부ਜਾਏ ਕਹ 타ਹੀ ਕੇ ਸੰਗ ਜਰੈਗੀ ਰਾਦੇ ਬਾਜੂ ਦੂਰ ਸੋ ਸੋਇਆ ਪ੍ਰੇਮ ਛਕੀ ਆਪਣੇ ਮੁਖਤੇ ਇਹ ਪਾਂਤ ਕਹਿਓ ਬ੍ਰਿਕ ਭਾਨ ਕੀ ਜਾਈ ਸ਼ਿਆਮ ਕਹ ਮਥਰਾ ਤਜ ਕੈ ਬ੍ਰਿਜ ਹੋ ਅਬਧੋ ਹਮਰੀ ਗਤ ਕਾਈ ਦੇਖਦੀ ਪੁਰ ਕੀ ਤ੍ਰੀ ਕੋ ਸੋ ਛਕੇ ਤਿਨ ਕੇ ਰਸ ਜੀ ਆਈ ਕਾਨ ਲਯੋ ਕੁਬਜਾ ਬਸ ਕਹਿ ਟਸ ਕਿਉ ਨਹੀਓ ਕਸ ਕਿਉ ਨ ਕਸਾਈ ਸੋਇਆ ਸੇਤ ਬਣੀ ਸੰਗ ਫੂਲਨ ਸੁੰਦਰ ਚਾਂਦਨੀ ਰਾਤ ਪਲੀ ਛਵ ਪਾਈ ਸੇਤ ਬਹਿ ਜਮਨਾ ਪਟ ਹੈ ਸਿਤ ਮੋਤਨ ਹਾਰ ਕਰੇ ਛਵ ਛਾਈ ਮੈਨ ਚੜਿਓ ਸਰ ਲੈ ਬਰ ਕਹਿ ਬਦਵੇ ਹਮ ਕੋ ਬਿਨ ਜਾਨ ਕਨਾਈ ਸੋ ਲਯੋ ਕੁਬਜਾ ਬਸ ਕਹਿ ਟਸ ਨਹੀਓ ਕਸ ਕਿਉ ਸੋਇਆ ਰਾਤ ਬਣੀ ਕਨਕੀ ਅਤਿ ਸੁੰਦਰ ਸ਼ਾਮ ਸ਼ਿੰਗਾਰ ਪਲੀ ਛਬ ਪਾਈ ਸ਼ਾਮ ਬਹਿ ਜਮਨਾ ਤਰੇ ਇਹ ਜਾ ਬਿਨ ਕੋ ਨਹੀਂ ਸ਼ਾਮ ਸਹਾਈ ਸ਼ਾਮ ਲਗਿਓ ਦੁਖ ਦੇਵਨ ਐਸੇ ਕਹੋ ਬ੍ਰਿਖ ਭਾਨਹ ਜਾਈ ਸ਼ਾਮ ਲਿਓ ਕੁਬਜਾ ਬਸ ਕੈ ਟਸਖਿਓ ਨਾ ਯੋ ਨਾ ਕਖਾਈ ਸੋਇਆ ਫੂਲ ਰਹੇ ਸਿਗਰੇ ਬ੍ਰਿਜ ਕੇ ਤਰ ਫੂਲ ਨਤਾ ਤਿਨ ਸੋ ਲੁਪਟਾਈ ਫੂਲ रहे सरसार सि सुंदर सोब समूह बढी अधिकाई चेत चढ़यो सुख सुंदर कोकिल काजत कंत बिना ना सुहाई दासी के संग रह हो गए हो टस क्यों ना ही ओ कस क्यों ना कथाई बास सुबास आकाश मिली अर बासत ਪੈਰ ਪ੍ਰਾਗ ਰਹੀ ਹੈ ਬੈਸਾਖ ਸਬੈ ਬ੍ਰਿਜ ਲੋਗਨ ਕੀ ਦੁਖਦਾਈ ਮਾਲਨ ਲੈਬ ਕਰੋ ਰਸ ਕੋ ਤਸ ਕਿਉ ਨਹੀ ਹੋ ਕਸ ਕਿਉ ਨੰ ਕਸਾਈ ਸਈਆ ਨੀਰ ਸਮੀਰ ਉਤਾਸਨ ਕੇ ਸਮ ਔਰ ਆਕਾਸ ਤਰਾ ਤਪਾਈ ਪੰਥ ਨ ਪੰਥੀ ਚ ਲੈ ਕੋ ਗੋ ਤਰ ਤਾਗ ਤਰੈ ਤਨ ਤਾਪ ਸਿrai ਜੀਤ ਮਹਾ ਬਲਵੰਤ ਪਯੋ ਅਤ ਬਿਆਕੁਲ ਜੀ ਮਹਾਰਿਤ ਪਾਈ ਐਸੇ ਸਕਿਉ ਤਸ ਕਿਉ ਕਿਉ ਟਸ ਕਿਉ ਨਹੀ ਓ ਕਸ ਕਿਉ ਨਾ ਕਸਾਈ ਸਵਯਾ ਪੌਨ ਪ੍ਰਚਾਂਡ ਬਹੈ ਅਤਿ ਤਾਪਤ ਚੰਚਲ ਦਸੋ ਦਿਸ ਭਾਈ ਬੈਸ ਆਵਾਸ ਰਹਿ ਨਰ ਨਾਰ ਬਹਿੰਗਮ ਵਾਰ ਸੋਛਾ ਕਾਈ ਦੇਖ ਅਸਾੜ ਨਈ ਰਿਤ ਦਾਦਰ ਮੋਰਨ ਹੂ ਕਨਪੋਰ ਲਗਾਈ ਗਾੜ ਪਰਿ ਬਿਰਹੀ ਜਨ ਕੋ ਟਸ ਕਿਉ ਨਹੀ ਓ ਕਸ ਤਾਲ ਭਰੇ ਜਲ ਪੂਰਨ ਸੋਵਰ ਸਿੰਧ ਮਿਲੀ ਸਰਤਾ ਸਬ ਜਾਈ ਤੈਸੇ ਘਟਾਨ ਛਟਾਨ ਮਿਲੀ ਅਤ ਹੀ ਪਪੀਆ ਪੀ ਲਗਾਈ ਸਾਵਨ ਮਾਹੇ ਲਗਿਓ ਪਰਸਾਵਨ ਪਾਵਨ ਨਾਹੇ ਹਹਾ ਕਰ ਮਾਈ ਲਾਗ ਰਿਓ ਪੁਰ ਸੋ ਤਸ ਕਿਓ ਨਹੀ ਨਾ ਕਸਾਈ ਸੋਇਆ ਫਾਦ ਮਾਹੇ ਚੜਿਓ ਬਿਨ ਦਸੋ ਦਿਸ ਮਾਹੇ ਕਟਾ ਕਹਰਾਈ देव सिने नह जान परय तम बिज्ज छटा रव की छप पाई मूसल तार छटा नभ ते अवनी सगरी जल पूर्ण छाई ऐसे समय तज गयो हम को टस क्यों ना योग कस क्यों ना कसाई सोया महास्कवार चढ़यो बलतार पुकार रही ना मिले सुखदाई सेठ कटा हर रात छटा सर पूंगे अटा सिम कह दरसाई ਨੀਰ ਬਹੀਨ ਫਿਰੈ ਨਭ ਛੀਨ ਸੋ ਦੇਖ ਹਦੀਨ ਭਇਓ ਹਿਯ ਰਾਈ ਪ੍ਰੇਮ ਛਕੀ ਤਿਨ ਸੋ ਬਿਥ ਕਇਓ ਟਸਕਿਓ ਨਾਹੀਓ ਕਸਕਿਓ ਨਾ ਕਸਾਈ ਕਾਤਕ ਮੈ ਗੁਨ ਦੀਪ ਪ੍ਰਕਾਸ਼ਤ ਤੈਸੇ ਆਕਾਸ ਮੈ ਉਜਲ ਤਾਈ ਜੂਪ ਜਹਾਂ ਤਾ ਫੈਲ ਦਇਓ ਸਿਗਰੀ ਨਰ ਨਾਰਨ ਖੇਲ ਮਚਾਈ ਚਿਤਰ ਭੈ ਕਰ ਅੰਗਨ ਦੇਖ ਗਚੇ ਤਾਕੇ ਅਰਚਿਤ ਪਰਮਾਈ ਆਇਓ ਨਹੀਂ ਮਨ ਪਾਇਓ ਤਹੀਂ ਟਸਕਿਓ ਨਾਹੀਓ ਕਸਕਿਓ ਨਾ ਕਸਾਈ ਸੋਇਆ ਬਾਹਰ ਜਫੂਲ ਰਹੇ ਸਰਪੁੰਜ ਸੁਗੰਧ ਸੁਨੇ ਸਰਤਾਨ ਘਟਾਈ ਕੁੰਜਿਤ ਕੰਤ ਬਿਨਾ ਕੁਲ ਹੰਸ ਕਲੇਸ਼ ਵਢੇ ਸੁਨ ਕਹਿਤ ਹਮਾਈ ਬਾਸੁਰ ਰਹਿਣਾ ਚੈਨ ਕਹੋ ਛਿਨ ਮੰਗਰ ਮਾਸਯੋ ਨਾ ਕਨਾਈ ਜਾਤ ਨਹੀਂ ਤਿੰਸੌ ਮਸ ਕਿਓ ਟਸਕਿਓ ਨਾਹੀਓ ਕਸਕਿਓ ਨਾ ਕਸਾਈ ਸੋਇਆ पुहुं में आकाश या उदास बढी अति शीतल ताई कूल दो कूल ते सुूल उठै सब तेल तमूल लगै दुखदाई पोख संतोष न होत कछो तन सोखत ज्यों कुमदी मुरझाई लोभ रयो उन प्रेम गहो टस क्यों नहि ओ कस क्यों न कसाई माहे मैं नाहे नहीं कर माहे सो दाहा करै दिखाई ਜਾਨੀ ਨਾ ਜਾਤ ਬਿਲਾਤਤ ਦਿਉ ਸੰਨਮ ਰੈਨ ਕੀ ਵਿਰਧ ਪਈ ਅਧਿਕਾਈ ਕੋਕਲ ਦੇਖ ਕਪੋਤ ਸਲੀ ਮੁਖ ਕੂੰਜਿਤ ਏ ਸੁਣ ਕੈ ਡਰ ਪਾਈ ਪ੍ਰੀਤ ਕੀ ਕਰੀ ਹੁਨ ਸੋ ਦਸ ਕਿਉ ਨਹੀ ਓ ਕਸ ਕਿਉ ਅੰੰਕਸਾਈ ਸਵਈਆ ਅਨੁਰਾਗ ਸੁਹਾਗਨ ਭਾਗ ਸੁਹਾਗ ਸੁਹਾਈ केसर तीर बनाए शरीर गुलाब वीर गुलाल उड़ाई सो छब मैन लखी जन द्वार्ष रमास की सोब त्याग जगाई आस को त्याग निराश पई तस क्यों न यो कस क्यों न